ਮਾਣਾ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਾ ਕਿਹੜਾ ਲੇਖਾ ਪੜ ਲਿਆ ਮਾਨੂੰ ਕਹਿੰਦਾ ਆਪਣ ਨੂੰ ਤਾਂ ਪੜ ਕਿਹੜਾ ਲੇਖਾ ਪੜ ਲਿਆ ਤਨਤਨ ਰਾਜਾ ਜਨਕਾਏ ਪੜਾਤਾ ਲੇਖਾ ਜਿਹਨੂੰ ਸਬਰ ਨੇ ਕੀ ਬਵੇਕ ਇੱਕ ਘੜੀ ਕੇ ਸਬਰ ਨੇ ਤਰੇ ਦੇਖ ਸੇਵਲ ਨੇ ਕਹਿੰਦੇ ਜਾਣ ਕੇ ਕੀਤਾ ਬਾफी ਹੋਰ ਛੁੱਟ ਗਏ ਕਿਵੇਂ ਛੁੱਟ ਜਾਣਗੀ ਗੁਰਮਤਿ ਦੇ ਖਿਲਾਫ ਪਾਣੀ ਮੈਂ ਪੀਣਾ ਸਾਰੇ ਸੰਸਾਰ ਦੀ ਪਿਆਸ ਦੂਰ ਹੈ ਰਾਜੇ ਨੂੰ ਪਾਣੀ ਪਿਲਾ ਦੋ ਪ੍ਰਜਾ ਨੂੰ ਪਿਆਸ ਨਹੀਂ ਲੱਗੂ ਜੇ ਰਾਜਾ ਪਾਣੀ ਪੀ ਲਵੇ ਵੀ ਪ੍ਰਜਾ ਨੂੰ ਟੱਲ ਲਗੂਏ ਦੀ ਇੱਕ ਮੈਨੂੰ ਜੂ ਆਪੜਾ ਆਪੜਾਈ ਹੋਈ ਸੀ ਪੰਡਤ ਦੀ ਠੀਕ ਹੈ ਗੱਲ ਕੋਈ ਗੁਰਦਾਸ ਦੀ ਬਾਰਾਣੇ ਗੁਰਦਾਸ ਦੀ ਬਾਰਾਣੇ ਬਦਵਾਨਾ ਨੇ ਬਧੀ ਹੋਇਆ ਬਾਰਾ ਜਹ ਹੈ ਵੀ ਕਿ ਨਹੀਂ ਮੈਨੂੰ ਪੜਿਆ ਨਹੀਂ ਅੱਜ ਹੈਗਾ ਹੈਗਾ ਜੇ ਤੁਸੀਂ ਕਹਿਣ ਹੈਗਾ ਤਾਂ ਹੋਊਗਾ ਪਰ ਹੋਰ ਕਹਿੰਦੇ ਤਾਂ ਸੁਣੇ ਨੇ ਆਪ ਪ੍ਰਚਲਨ ਪ੍ਰਚਾਰ ਪ੍ਰਚਾਰ ਦੇ ਵਿੱਚ ਪ੍ਰਚਲਨ ਦੀ ਗੱਲ ਕਰਨਾ ਪੜਨ ਦਾ ਦੇ ਮੂਹੋਂ ਛੋੜਿਆ ਹੈ ਰਾਜੇ जनक ਦੀ गल, ਪੰਡਤੇ प्रचार ਕਰਦੇ ਵੀ 18 ਪਰ ਉਹਨੇ ਉਹ ਜਿਹੜੇ ਸੀ ਗਰਖ ਖਤਮ ਕਰਤੇ ਇੱਕ ਚੰਗਾ ਪੌਣ ਸਾਨੂੰ ਬਾਪ ਨਾ ਪੁੱਜਣੀ ਹਾ ਗੁਰਬਾਣੀ ਦੀ ਗੱਲ ਵਰਤੀ ਨਹੀਂ ਤੁਸੀਂ ਇਹ ਗੱਲ ਦਾ ਪ੍ਰਚਾਰ ਕੀਤਾ ਕਿਉਂ ਅਸਰ ਦੇ ਵਿੱਚ ਬਲੈਕ ਮੈਲ ਨਹੀਂ ਕਰ ਰਹੀ ਸੀ ਕਰ ਲਈ ਬਾਇਆ ਚਾਹੀਦੀ ਸੀ ਬਾਇਆ ਦੀ ਭੁੱਖ ਪੂਰੀ ਕਰਨੀ ਸੀ ਇਹਨੂੰ ਬਾਇਆ ਦਾ ਰੀਲ ਕੋਲ ਪ੍ਰਚਾਰ ਹੁੰਦਾ ਬਾਇਆ ਦਾੜੀ ਤੰਨਾ ਬੋੜਾ ਹੁੰਦਾ ਬਾਇਆ ਦਾੜੀਆ ਤੰਨਾ ਬੋੜਾ ਹੈ ਇਸ ਕਰਕੇ ਹੁਣ ਸਾਰੇ ਸਿੱਖ ਚਾਹੇ ਉੱਤੇ ਤੇ ਲੈ ਕੇ ਥੱਲੇ ਤੱਕ ਜਿੱਤੇ ਦੇ ਕੋਲ ਪ੍ਰਚਾਰ ਦਾ ਹੈ ਬੋਲੇ ਹੋਏ ਹਨ ਜਿਹੜੇ ਅੰਨੇ ਬੋਲੇ ਨਹੀਂ ਉਹ ਚੁੱਪ ਕਰਕੇ ਬੈਠੇ ਰਹੇ ਨੇ ਉਹ ਚੁੱਪ ਕਰਕੇ ਬੈਠੇ ਰਹੇ ਤੇ ਉਹ ਖੋਜ ਰਹੇ ਤੇ ਦੇਖ ਰਹੇ ਸੀ ਗੱਲ ਕੀ ਹੈ। ਜੇ ਗੱਲ ਕਿਤੇ ਵੀ ਕਰ ਰਹੇ ਨੇ ਉਹ ਥੋੜੇ ਜੇ ਏਰੀਆ ਚ ਕਰਕੇ ਦੇਖਦੇ ਨੇ ਦਵਾਈ। ਜਿਹੜੀ ਦਵਾਈ ਨਵੀਂ ਬਣਦੀ ਹੈ ਪਹਿਲਾਂ ਕੁਝ ਬੰਦਿਆਂ ਤੇ ਆਪਣੇ ਟੈਸਟ ਕਰਕੇ ਦੇਖੀ ਦੀਏ। ਚੂਹਿਆਂ ਤੇ ਟੈਸਟ ਕਰੀ ਦੀਆ ਕੋਈ। ਕੁੱਤੇਆਂ ਤੇ ਟੈਸਟ ਕਰਦਾ ਕੋ ਬਿੱਲੀ ਤੇ ਟੈਸਟ ਕਰਦਾ। फिर ਜੇ ਉਹ ठीक ਠੀਕ ਆ ਜੇ ਫਿਰ ਆਦਮਿਆਂ ਦੇ ਟੈਸਟ ਹੁੰਦੀ ਹੈ ਜਦ ਕਾਲ ਮਿਆਬ ਹੋ ਜਾਏ देखे ਸਾਈਡ ਇਫੈਕਟ ਦੇਖੇ ਜਾਂਦੇ ਨੇ ਫਿਰ ਉਹ ਬਾਹਰਗੜ ਚ ਲੈ ਜਾਂਦੀ ਹੈ ਬਾਹਰਗੜ ਜੇ ਲੈਵੜ ਤੋਂ ਪਹਿਲਾਂ ਪਹਿਲਾਂ ਬੜੇ ਟੈਸਟ ਕਰਨੇ ਪੈਂਦੇ ਨੇ ਸਿਆਣੇ ਆਦਮੀ ਜਿਹੜੇ ਹੋਏਵੇਂ ਕਰਦੇ ਨੇ ਨਹੀਂ ਬਾਕੀ ਪਹਿਲੇ ਠੋਕ ਦਿੰਦੇ ਨੇ ਠੀਕ ਹੈ ਕੁਝ ਵਰ ਜਾਂਦੇ ਨੇ ਕੋਈ ਹੰਦ ਅੰਗ ਪੈਰ ਦਰਬਾਲੇ ਵਾਲੇ ਵਰਗੇ دیوਗੇ ਦਵਾਈ پرانی ਹੁੰਦੀ ਐ ਸੀਸੀ ਨਵੀਂ ਦੀ 11ਵਲ ਪ੍ਰਾਣੀ ਦਵਾਈ ਨੂੰ ਨਵੇਂ ਪੈਕ ਪੈਕਾ ਨਵਾਂ ਕਰਕੇ ਦਿੰਦੇ ਨੇ ਉਹਨੇ ਪੈਕ ਕਿਤਾ ਦੇ ਰਿਹਾ ਜਿੰਨਾ ਬਣਾਇਆ ਹੈ ਦਵਾਈ ਕੋਈ پرانی ਜਿਹਦੇ ਖਿਲਾਫ ਉਹ ਕਰਦੀ ਐ ਪੈਕਾ ਕੋਨੇ ਹੋਰ ਬਣਾ ਲਿਆ ਦਰਬਾਲੇ ਵਾਲੇ ਨੂੰ ਜੰਗ ਸਰਨਾ ਉਜੋਗਮਾਂ ਤੇ ਦੇ ਰਿਹਾ ਥੋੜ੍ਹਾ ਰੋੜਕੇ ਕਬੀਰੇ ਦੀਆਂ ਫਕਰੀਆਂ ਲਾ ਕੇ ਥੋੜਾ ਇਹ ਵਿੱਚ ਕੱਢ ਰੋਹਿੰਦੋ ਨਾ ਉਹਨੇ ਕਹਿ ਤਾਪੜੂ ਚਲੇ ਗਈ ਗੱਲ ਜਹੇਦਾਰ ਕੋ ਬੇਦਾਨਤੀ ਕੋ ਬੇਰਾਨਤੀ ਸੀ ਬੇਦਾਨਤੀ ਸਾਰਿਆਂ ਨੂੰ ਸਿਆਣਾ ਸੀ ਗੁਰਮਤ ਸਾਰਿਆਂ ਨੂੰ ਇਹਨੋਂ ਨਾਲ ਜ਼ਿਆਦਾ ਜਾਣਦਾ ਸੀ ਜਿਹੜੇ ਹੁਲਡ ਸਾਰਿਆਂ ਨੂੰ ਉਹਦੀ ਸੋਝੀ ਜ਼ਿਆਦਾ ਸੀ ਉਹ ਫੇਰ ਵੀ ਕਿਸੇ ਟਕਰਾਅ ਵਿੱਚ ਪੜਿਆ ਹੋਇਆ ਸੀ पढ़ता पर वजन जब दिल दिलचस्पी है पर गर्बचन तो बहुत ज्यादा थी राकेश वो वैद्य करता रहे पढ़ता भी रहा पर उसकी दिलचस्पी थी फिर वापस जब वजन चलो जब दूर भी दिलचस्पी है ये दिलचस्पी है ऐसा करूं दिया फिर भी डेवलप हो जाता है पर कईों का दिलचस्पी नहीं होती ਉਹਦਾ ਹਜੂਰ ਸਾਹਿਬ ਵਾਲੇ ਨੂੰ ਪਤਾ ਹੀ ਨਹੀਂ ਕਿ ਹੁੰਦੀ ਹੈ ਬਾਣੀ ਉਹਨੇ ਕੀ ਲੈਣਾ ਤੇ ਉਹਦੇ ਠੱਪਾ ਲੱਗਿਆ ਹੈ ਜਿਹਦਾਰੀ ਦਾ ਵਾ ਠੀਕ ਹੈ ਠੱਪੇ ਵਾਲੇ ਵੀ ਉਹਦੇ ਨੇ ਕਹੀ ਹੈ ਐਸਾ ਲੇਖਾ ਤੂੰ ਕੀ ਪੜਿਆ ਉਹਨੇ ਐਸਾ ਲੇਖਾ ਪੜ ਲਿਆ ਕਿਹਦਾ ਪੜ ਲਿਆ ਬਈ ਦਾਤ ਦੇ ਕੇ ਪੁੱਤ ਨਾਲ ਪਾਵਾ ਬੈਲੈਂਸ ਹੋ ਜਾਂਦਾ ਜੇ ਪਾਪ ਹੋ ਗਿਆ ਤਾਂ ਉਹਦਾ ਰਾਜ ਹੈ ਉਹਦਾ ਉਪਾਏ ਹੈ ਉਪਾਏ ਹੁੜ ਵੀ ਉਪਾਏ ਕਰਦੇ ਨੇ ਰੋਜ ਉਪਾਏ ਕਰਦੇ ਨੇ ਐ ਘਰਾ ਦਾ ਐ ਪਾਏ ਐ ਘਰਾ ਘਰਾ ਦਾ ਦੁਕਾਨਾਂ ਚਲਦੀਆਂ ਨੇ ਸਿੱਖ ਬੰਦੇ ਨੇ ਇਸ ਗਾਲ ਨੂੰ ਸਿੱਖ ਵੀ ਬੰਦੇ ਨੇ ਬਾਦਲ ਵਰਗੇ ਬੰਦੇ ਨੇ ਸਾਰੇ ਜਿਹੜੇ ਡੇ ਡੇ ਨੇ ਅੱਗੂ ਗੁਰਬਾਣੀ ਕਹੇ ਆ ਸਾ ਲੇਖਾ ਕੀ ਪੜਕਿਓ ਕਿਹੜਾ ਪੜਿਆ ਤਾ ਇਹ ਲੇਖਾ ਲੇਖਾ ਛਾੜ ਲੇਖੇ ਛੁੱਟੇ ਪਰ ਜੇ ਇਹਨਾਂ ਨੇ ਛੁੱਟਣਾ ਨਹੀਂ ਇਹਨਾਂ ਤਾਂ ਵੱਜਣਾ ਜਿਹਦੇ ਵੱਜਣਾ ਇਹ ਤਾਂ ਵੱਜੇ ਹੋਏ ਨਰਮਾਇਚ ਛੁੱਟਣ ਵਾਲੇ ਵਾਸਤੇ ਉਹਦਾ ਲੇਖਾ ਦੇਣਾ ਤੇਰੇ ਸਿਰ ਛੁੱਟਣਾ ਉਹ ਲੇਖਾ ਪੜ ਦੇਵੇ ਜਿਹਦੇ ਵੱਜਿਆ ਰਣਾ ਉਹ ਲੇਖਾ ਉਹ ਆਪਣਾ ਉਹ ਭਰਮ ਭਰ ਰਿਹਾ ਲੇਖੇ ਦਾ ਉਹ ਨਾ ਗੱਲਾਂ ਦਾ ਭਰਮ ਉਹ ਭਰਮ ਜਾਲ ਚ ਫਸਿਆ ਆ ਬੰਦਰ ਹੋ ਗਈ ਉਹਨੇ ਤਾਂ ਅਲੈਕਸਰ ਦਿੱਤ ਉਹਨੂੰ ਸਭ ਕੁਝ ਕਰਨਾ ਪੈਣਾ ਲੋਕਾਂ ਦੇ ਵੀ ਇਹ ਜੀ ਐਨੇ ਹਵਲ ਕਰਾਤੇ ਜਿੱਤੂਗਾ ਲੋਕਾਂ ਤੇ ਪਤਾ ਨੂ ਵੀ ਇਹ ਵੀ ਅਜਿਹਾ ਕੋਈ ਅਸਰ ਨਹੀਂ ਪਰ ਪਾਬੰਦ ਤੇ ਅਸਰ ਪੈ ਜਾਂਦਾ ਨਾ ਪਤਾ ਨੂ ਵੀ ਇਹ ਵੀ ਇਹਦਾ ਕੋਈ ਅਸਰ ਜਾਣਦੇ ਸਾਰੇ ਨੇ ਇਹਦਾ ਕੋਈ ਅਸਰ ਨਹੀਂ ਪਰ ਪਬਲਿਕ ਨੂੰ ਤਾਂ ਪਰ ਪੈ ਜੋ ਨਾ ਪੱਕੇ ਖੁਸ਼ ਹੋ ਜਾਂਦੇ ਨੇ ਵੀ ਇਹਨੇ ਹਮਰ ਕੀਤਾ ਵੀ ਇਹਨੂੰ ਗੁਰਦੈਲੀ ਜਾਇਦਿ ਇਹ ਬੜਾ ਧਰਮੂਕ ਹੈ ਇਹਦਾ ਸਭ ਕੁਝ ਜਾਣਦੇ ਪਵਾਜੇ ਜੇਰੜ ਜਨਿਆਣਾ ਮੰਦਰ ਜੇਰੜ ਜਨਿਆਣਾ ਗੁਰਦੈਰ ਜੇਰੜ ਜਨਿਆਣਾ ਸਾਰੇ ਗੁਰੂ ਪੀਰ ਠੀਕ ਨੇ ਪਰ ਆਪਣਾ ਕੋਈ ਗਰੀ ਸਾਰੇ ਲੋਕਾਂ ਦੇ ਉਹਨਾਂ ਰਾਜੇ ਬੁੱਧਰ ਚਲੇ ਜਾਉਂ ਉਹਨਦਰ ਚਲੇਗਾ ਉਹਨਾਂ ਦਾ ਉਹਨਾਂ ਨੂੰ ਖੋਜ ਕਰਦੋ ਆਪਣਾ ਨਹੀਂ ਹੈ ਉਹਨਾਂ ਰਾਜਾ ਖੋਰਦਾਰੇ ਚਲੇ ਖੋਰਦਾਰੇ ਚਲੇਗਾ ਉਹਨਾਂ ਦਾ ਮੇਰਾ ਨਹੀਂ ਹੈ ਕੰਗਾ ਇੱਕ ਸਿੱਕੀ ਤੇ ਤੂੰ ਹੀ ਚੜਦੀ ਦੀ ਹੁੰਦੀ ਪਰ ਇਹਨਾਂ ਦਾ ਕੋਈ ਚੜੀ ਹੋ ਨਹੀਂ ਹੋਈ ਰੋਣਾ ਮੁਕੇ ਜਾਂ ਕੋਈ ਅੱਗੇ ਚੜਿਆ ਹੋਵੇ ਤਾਂ ਦੂਏ ਦੀ ਗੱਲ ਹੈ ਰੋਣਾ ਪੈਂਦਾ ਜਾਂ ਆਪਾਂ ਨੇ ਚੜ੍ਹਣੇ ਕੋਈ ਨਹੀਂ ਦਿੰਦਾ ਆਪਾਂ ਨੂੰ ਕੀ ਹੈ ਆਪਣਾ ਉਹ ਬਾਲਟੀਆਂ ਪਾੜੀ ਪਾੜੇ ਹਉੜੋ ਹਉਤ ਗਲਾਸਾਂ ਦੇ ਵਿੱਚ ਬਾਲਟੀਆਂ ਚ ਜਗਾ ਦੇ ਦੁੱਧ ਵੀ ਪਾੜੇ ਵੀ ਕੋਲ ਨੇ ਲੋਕ ਦਾਰੂ ਬਾਕੇ ਵੀ ਪੀ ਲੈਂਦੇ ਨੇ ਵੀਰ ਜੱਗਦਾ ਹੋਈ ਆ ਤੈਨੂੰ ਖਾਲੀ ਹੋ ਜਾਂਦਾ ਫੇਰ ਕੀ ਆ ਤੇਰਾ ਤਾਂ ਹਿੰਦਾ ਹੋ ਉਹ ਭਾਰੀਆਂ ਸ਼ਰਾਬ ਪਾ ਲੋ ਚਾਹੇ ਦੁੱਧ ਪਾ ਲੋ ਚਾਹੇ ਲੱਸੀ ਪਾ ਲੋ ਚਾਹੇ ਪਾਣੀ ਪਾ ਲੋ ਕੀ ਫਰਕ ਪੈਂਦਾ ਪਾਤਾ ਭੇੜੋ ਤਾਂ ਉਹ ਨਾ ਨਜਰ ਨਜਰ ਮੰਦਰ ਦੇ ਵਿੱਚ ਨਹੀਂ ਪਿਆ ਹੋਇਆ ਬਾਹਰ ਆ ਕੇ ਲੋਟ ਤਾਂ ਕੋਈ ਆ ਸਰ ਜੀ ਅਸਰ ਕਿਸੇ ਦਾ ਨਹੀਂ ਅਸਰ ਇਹ ਹੈ ਵੀ ਆਪਣੇ ਟਾਰਗੇਟ ਤੇ ਰਾਜ ਨੂੰ ਕੈਮ ਖਵੇਂ ਕੱਢ ਟਾਰਗੇਟ ਤਾਂ ਹੋਇਆ ਨਾ ਉਹਨਾਂ ਦਾ ਆਪਣਾ ਟਾਰਗੇਟ ਸੰਸਾਰ ਦਾ ਟਾਰਗੇਟ लेखा देना तेरे सिर रहे इस कर के जड़ा लेखा देना सिरते ही रंड तेली छड़दा क्योंकि लेखे दे बिचै जाना ता अगले जन विच आ जा <coughs> लेखा चलदा रहना जानो सुखबा जानो राव लोग सता रहे हो जाना थोड़ा बकाया फिर अगले अगले जन पैसे ही सिंध का ही रहना है ਜਿਵੇਂ ਲੇਖਾ ਤੁਹਾਡਾ ਬੈਂਕਾਂ ਦਾ ਚੱਲਦਾ ਹੈ ਫੈਕਟਰੀਆਂ ਦਾ ਚੱਲਦਾ ਹੈ ਕੋਈ ਉਹ ਬਣਾ ਲੈਂਦਾ ਆਪਣੀ ਗਰੇਸੇਟ ਲੇਬਰਟ ਬਣਾ ਲੈਂਦਾ ਜਮਾ ਕਰਕੇ ਕਢਾ ਲੇ ਜਮਾ ਕਰਦੇ ਜਿੰਨੇ ਜੇ ਫੈਕਟਰੀ ਚੱਲਦੀ ਹੈ ਚਲੀ ਜਾਂਦੇ ਲੇਖਾ ਬਸ ਫੈਕਟਰੀ ਬੰਦ ਹੋ ਗਿਆ ਬੰਦ ਹੋ ਜੇ ਕੋਈ ਵਾਰਸ ਦੂਆ ਜੂ ਇਹ ਅਗਲੇ ਸਾਲ ਅਗਲੇ ਜਨਵਰੀ ਚਲਾਉ ਫੇਰ ਸਹੀ ਆ ਜਾਂਦਾ ਲੇਖਾ